ਸ਼ਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨ ਮਹਿ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰ ਹੈ ਚਿਤਵੰਤ ਚਰਨ ਕਮਲ ਸਾਸ ਸਾਸ ਅਰਾਧਨ ਜਿਹੜਾ ਚਿਤ ਚਰਨ ਕਮਲਾਂ ਦਾ ਮਨ ਦੇ ਵਿੱਚ ਚਰਨ ਕਮਲਾਂ ਦਾ ਵਿਚਾਰ ਕਰਨਾ ਵਿਚਾਰ ਚੱਲਦਾ ਰਹੇ ਚਰਨ ਕਮਲਾਂ ਦਾ ਮਨ ਵਿੱਚ ਇਹੀ ਸਾਸ ਸਾਸ ਰਾਦਨ ਲਗਾਤਾਰ ਜੇ ਕਰਨਾ ਉਹਦਾ ਵਿਚਾਰ ਚੱਲਦਾ ਦਾ ਆਤਮ ਦੀ ਵਿਚਾਰ ਚਲਦੀ ਰਹੇ ਅੰਦਰ ਤਾਂ ਇਸ ਨੂੰ ਸਾਸ ਸਾਸ ਰਾਦਨ ਕਹਿੰਦੇ ਨੇ ਨਾਮ ਜੇ ਨਾਮ ਨਾਲ ਮਿਲੇ ਉਡੀਕ ਪੂਰੀ ਹੋ ਜਾਂਦੀ ਹੈ ਪਰਮੇਸ਼ਰ ਉਹਦੀ ਆਸ ਜ਼ਰੂਰ ਪੂਰੀ ਕਰਦਾ ਉਹਨੂੰ ਨਾਮ ਕਹਿਣ ਦਾ ਮਤਲਬ ਹੈ ਜੇ ਹਰ ਹਰ ਨਾਮ ਆਦਨ ਜੇ ਇਹ ਕਹੇ ਸਤਗੁਰੂ ਸਾਖ ਬਿਨੰਤੀਆਂ ਮਿਲੇ ਨਾਮ ਉਧਾਰਾ ਜੇ ਮੈਨੂੰ ਨਾਮ ਦੇ ਨਾਮ ਜ਼ਰੂਰ ਮਿਲਦਾ ਜੇ ਸਾਸਾ ਸਹੀ ਇਹ ਹੋਵੇ ਇੱਛਾ ਇਹ ਰਹੇ ਨਾ ਨਾਮ ਮਿਲ ਜਾਂਦਾ ਸਾਧਗਤ ਹੋ ਜਿਹੜੀ ਤੁਰਤੀ ਬਾਣੀ ਹੈ ਉਹਦੇ ਨਾਲ ਸੰਪਰਕ ਬਣ ਜਾਂਦਾ ਹੈ ਇਹਦਾ ਮਤਲਬ ਇਹ ਹਾਂਜੀ ਸ਼ੀਤਲ ਹੋ ਜਾਂਦਾ ਜਦ ਮਨ ਆਪਣੇ ਅੰਦਰ ਕੋਪ ਟਕਾ ਕੇ ਜਿਹੜਾ ਸ਼ੀਤਲ ਹੋ ਜਾਂਦਾ ਠੰਡਾ ਹੋ ਜਾਂਦਾ ਫੇਰ ਉਹ ਬਾਹਰ ਨਹੀਂ ਆਉਂਦਾ ਕੋਈ ਬਾਹਰ ਦਾ ਅਗਨ ਸੰਗਰ ਆ ਕੇ ਫੇਰ ਉਹ ਕਲਪਨਾ ਛੱਡ ਜਾਂਦੀ ਹੈ ਬਹੁਤ ਜ਼ਿਆਦਾ ਗਰਮੀ ਹੋਵੇ ਟੈਂਪਰੇਚਰ ਹੋਵੇ ਅੰਦਰ ਹੋਵੇ ਬਾਹਰ ਜੇ ਬਾਹਰ ਨਿਕਲੂਗਾ ਤਾਂ ਅੰਦਰ ਬਰਦਾ ਠੀਕ ਹੈ ਇਹ ਖੰਡੜੋ ਸਤਨ ਜਿਹੜਾ ਸੱਚਵਲ ਧਿਆਨ ਲੱਖਦਾ ਹੈ ਧਨੀ ਹੁੰਦਾ ਜਿਹੜਾ ਪੁਰਸ਼ ਸੱਚਵਲ ਧਿਆਨ ਲੱਖਦਾ ਹੈ ਜਿਹੜਾ ਗਿਆਨਵਾਨ ਧਨੀ ਜਾਣਵਾਲ ਨੂੰ ਕਹਿੰਦੇ ਹੋਵੇ ਸਤਰੀ ਉਹ ਜਾਣ ਆਸਾ ਪੂਰੀ ਹੁੰਦੀ ਹੈ ਉਹ ਜਾਣਦੀ ਹੈ ਵਿਆਹ ਸਦਾ ਸਖੰਡੜੋ ਸਤਨ ਜਿਹੜਾ ਸਦਾ ਹੀ ਸੱਚਵਲ ਧਿਆਨ ਰੱਖੇ ਗੁਰੂ ਦਾ ਨਾਮ ਜਰੂਰ ਮਨ ਲਾਓ। ਉਹਦੀ ਸਭੇ ਖਪੂਰੀਆ ਹੋ ਸੱਚੀ ਬਾਣੀ ਉਹਨੂੰ ਮਿਲ ਜਾਂਦੀ ਹੈ ਫਿਰ। ਹਾਂਜੀ। ਕੌੜੀ ਆਸਾਵੰਤੀ ਆਸ ਗੁਸਾਈ ਮਿਲ ਗੋਪਾਲ ਗੋਵਿੰਦ ਨਾ ਕਬੂ ਝੂਰੀਏ। ਹੁਣ ਜਿਹੜਾ ਇਸ ਆਸ ਦੇ ਵਿੱਚ ਆਪਣੇ ਅੰਦਰ ਜੁੜਿਆ ਰਹਿੰਦਾ ਉਹਦੀ ਆਸ ਜ਼ਰੂਰ ਪੂਰੀ ਹੁੰਦੀ ਹੈ। ਗੋਸਾਈਂ ਜ਼ਰੂਰ ਪੂਰੀ ਕਰਦਾ ਹੈ। ਉਹਦੀ ਆਸ ਫਿਲ ਗੋਪਾਲ ਗੋਬਿੰਦਨ ਕਾ ਉਹ ਝੂੜੀ ਹੈ। ਜਦ ਗੋਪਾਲ ਗੋਬਿੰਦ ਨਾਲ ਨਾ ਪੂਰੀ ਹੋਵੇ। ਜਦੋਂ ਆਸ ਪੂਰੀ ਹੁੰਦੀ ਫਿਰ ਆਦਮੀ ਝੂੜਦਾ। ਉਹਨੂੰ ਨਹੀਂ ਝੂੜਨਾ ਪੈਂਦਾ। ਉਹਦੀ ਆਸ ਪੂਰੀ ਹੁੰਦੀ ਹੈ ਨਾ ਜ਼ਰੂਰ। ਉਹ ਨਹੀਂ ਝੂੜਨਾ ਇੰਦਾਂ। ਗੋਪਾਲਰ ਗੋਬਿੰਦ ਲੱਗ ਲੱਗ ਹੈ ਗੋਬਿੰਦ ਹੀ ਗੋਪਾਲ ਹੈ। हे गोविंद हे गोपाल हे दयाल लाल इतरे ही ना होने सारे लाल भी यो ही है लाल भी यो ही है गोविंद भी यो ही है गोपाल भी यो ही है ए चित्त नु केहा गया जी? हाँ जी हाँ। ਲੈ ਜਾਏ ਵਿਸ਼ੂਰੀਏ ਜੋ ਉਹ ਕੀ ਕਹਿੰਦਾ ਦੇਖੋ ਦਰਸ਼ਮਣ ਚਾਓ ਉਹ ਦੇ ਮਨ ਚ ਚਾਓ ਹੁੰਦਾ ਉਹ ਦੇ ਲੈ ਜਾਏ ਵਿਸ਼ੂਰੀਏ ਆ ਜਿਹੜੇ ਨੇ ਮੇਰੇ ਦੀਆਂ ਤੇ ਨੇ ਇਹ ਪੈਦਾ ਹੀ ਨਾ ਹੋਵੇ ਲੈ ਜਾਣੇ ਵਿਸ਼ੂਰੀਏ ਮਾਇਆ ਦੀ ਛਾਵਾਂ ਨੇ ਤ੍ਰਿਸ਼ਨਾ ਜਿਨਾ ਕਰਕੇ ਇਹ ਲੈ ਜਾਣ ਛੱਡੇ ਜਾਣ ਮੈਨੂੰ ਹੋਏ ਪਵਿੱਤਰ ਸਰੀਰ ਚਰਨਾ ਧੂਰੀਏ ਹੋਏ ਪਵਿੱਤਰ ਸਰੀਰ ਚਰਨਾਂ ਦੀ ਧੂੜ ਹੈ ਮੇਰਾ ਸਰੀਰ ਜਿਹੜਾ ਹਿਰਦਾ ਪਵਿੱਤਰ ਹੋ ਜਵੇ ਤੇਰੇ ਚਰਨਾਂ ਦੀ ਧੂੜ ਨਾਲ ਚਰਨਾਂ ਦੀ ਧੂੜ ਪੀਆ ਗਿਆਨ ਜਿਹੜਾ ਗਿਆਨ ਹੈ ਗੁਰਬਾਣੀ ਹੈ ਧੂੜ ਹੀ ਸਮਝੋ ਸਾਰੇ ਸਰੀਰ ਪਵਿੱਤਰ ਹੋ ਜਾਂਦਾ ਗੁਣ ਆ ਜਾਂਦੇ ਨੇ ਸਰੀਰ ਪਵਿੱਤਰ ਹੋ ਜਾਂਦਾ ਪਰਮ ਬ੍ਰਹਮ ਗੁਰਦੇਵ ਸਦਾ ਹਜ਼ੂਰੀ ਹੈ ਬ੍ਰਹਮ ਪਰ ਗੁਰਦੇਵ ਦੋਏ ਆ ਦੀ ਹਜ਼ੂਰੀ ਵਿੱਚ ਫਿਰ ਰਹਿੰਦਾ ਹੋ ਜਿਵੇਂ ਗੁਰਦੇਵ ਆ ਉੱਥੇ ਹੀ ਪਾਰਬ੍ਰਮ ਉੱਥੇ ਹੀ ਸ਼ਬਦ ਗੁਰੂ ਪ੍ਰਗਟ ਹੁੰਦਾ ਪਾਰਬ੍ਰਮ ਉੱਥੇ ਹੀ ਪਰਮੇਸ਼ਰ ਉੱਥੇ ਹੀ ਪ੍ਰਗਟ ਹੋ ਜਾਂਦਾ ਗੁਰਦੇਵ ਆ ਪਾਰਬ੍ਰਮ ਦੀ ਤੇ ਵਸਦਾ ਬਰੂਪ ਹੋ ਜਾਂਦਾ ਨਾ ਠੀਕ ਹੈ ਜੀ ਫਿਰ ਰੂਪ ਹੋ ਕੇ ਫਿਰ ਸੱਚਖੰਡ ਦਾ ਵਾਸੀ ਹੋ ਜਾਂਦਾ ਠੀਕ ਹੈ ਜੀ ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ